ਹਾਂਜੀ 15ਵੀਂ ਪੌੜੀ ਦੀ ਸ਼ੁਰੂਆਤ ਹੈ ਜੀ ਦੁਆ 10 ਮੁੰਦਰਾ ਮਨ ਉਹ ਤੂਤਾ ਐਨ ਇਸ ਸੂਤਾ ਦੁਆ ਦੀਆਂ 12 ਹੁੰਦੇ ਨੇ ਨਾ ਪੂਜਦੇ ਮੂਰਤੀਆਂ ਫੋਟੋ ਦੀ ਮੁੰਦਰਾ ਬਣਾਈ ਹੁੰਦੀ ਹੈ ਜਿਵੇਂ ਪੰਜ ਕੋਈ ਘੋੜੇ ਬਣਾ ਦੂ ਆਡਾ ਟੂੜਾ ਦੇ ਘੋੜੇ ਹੋਣਗੇ ਦਾ ਧਿਆਨ ਕਿੱਧਰ ਰੂਕੇ ਦਾ ਮੂੰਹ ਕਿੱਧਰ ਚੱਕਿਆ ਹੋ ਹੋ ਇਹ ਬਣਾਉਂਦੇ ਨੇ ਹੁੰਦੀ ਹੈ ਉਹ 12 ਪ੍ਰਕਾਰ ਦੀ ਮੋਦਰਾ ਲੈ ਇਹਨਾਂ ਨੇ ਕੀਤੇ ਨੇ ਨਾ 12 ਧੋਨੇ ਨੇ ਇਹਨਾਂ ਦੇ 12 ਪ੍ਰਕਾਰ ਦੀ ਮੋਦਰਾ ਇਹਨਾਂ ਦੀ ਆ ਜਿਹੜੇ ਐਕਟਰ ਹੁੰਦੇ ਨੇ ਉਹ ਵਾਲੀ ਕਦੇ ਕ੍ਰੋਧ ਵਾਲੀ ਕਦੇ ਕੈਸੇ ਵਾਲੀ ਉਹ ਹੀ ਹੁੰਦੀ ਕੀ ਹੁੰਦੀ ਹੈ 12 ਮੈਂ ਜੋਗੀ ਫਰਮਾਇਓ ਹੀ ਹੈ ਜੀ ਇਹ ਉਹੀ ਆ ਉਹੀ ਆਹੀ ਬਸ ਗੱਲ ਹੈ ਗੱਲਾਂ ਉਹੀ ਮੁਰਮੁਰ ਕਹੀਆਂ ਹੋਈਆਂ ਨੇ ਨਿਖਾਨਾ ਹੁਣ ਹੋਰ ਨੇ ਬਣਾਇਆ ਕਿਸੇ ਦੇ ਪ੍ਰਥਾਏ ਗਈ ਹੋਈ ਹੈ ਹਰ ਇੱਕ ਗੱਲ ਠੀਕ ਹੈ ਜੀ ਉਹ ਤੂਤਾ ਵੀ ਤਾਂ ਹੀ ਆ ਰਿਹਾ ਕਰਣ ਉਹ ਨੂੰ ਜੋਗੀ ਕਹਿੰਦਾ ਤੋਂ ਕੰਮ ਨਹੀਂ ਲੈਣਾ ਬਸ ਫਮੁੰਦਰਾ ਹੀ ਵਾ ਬਾਪੂ ਦੜਾ ਪਾਈਏ ਗਾਣ ਅਗਲੇ ਚ ਪੜ ਕੇ ਕੀ ਜੈਤਾਨ ਨਾਨਕ ਆਖੇ ਰਾਹ ਹੋਰ ਗੱਲਾਂ ਸ਼ੈਤਾਨ ਸ਼ੈਤਾਨ ਤਾਂ ਹੀ ਹੋਵੇ ਨਾ ਜੋਗੀ ਅਗੰਧੋਂ ਕੰਮ ਅਗੰਧੋਂ ਕੌਮ ਤੋਂ ਬੰਦ ਕਰਦੇ ਲੋਕ ਆ ਵੀ ਬਾਣੀ ਪੜੀ ਜੋ ਪੜੀ ਜੋ ਆਪੇ ਸਮਝ ਆ ਜੂਗੀ। ਸੰਤ ਵੀ ਕਹਿੰਦੇ ਨੇ ਅਗਲ ਤੋਂ ਕੰਮ ਨਾਲ ਉਹਨਾਂ ਜੋ ਆਏ ਨੇ ਫਾਰੇ ਨੇ ਹਾਂਜੀ ਐਨ ਸ ਜਾਗ ਨਾ ਸੂਤਾ। ਆਨਨ ਨੂੰ ਹੁੰਦਾ ਹੀ ਸੀ ਅਸੀਂ ਤਾਂ ਦਿਨ ਦਾ ਜਾਗਦੇ ਹੀ ਰਹਨੇ ਮਾਨੋ ਤੂਤਤਾ ਹੋਇਆ ਹੋਇਆ ਪਰ ਹੁਣ ਲੋਕਾਂ ਨੂੰ ਕਹਿੰਦੇ ਅਸੀਂ ਜਾਗਦੇ ਆਂ ਜਾਗਤ ਜਾਗ ਰਹੇ ਲਿਵ ਲਾਏ ਗੁਰ ਪਰਚੈ ਜਿੰਨਾ ਚਿਰ ਲਿਵ ਲੱਗੀ ਹੋਣਾ ਚਿਰ ਜਾਗਦਾ ਦੀ ਲਿਵ ਤਾਂ ਲੱਗੀ ਹੋਈ ਕਿਤੇ ਉਹਦਾ ਕਦੇ ਕਦੇ ਲਿਵ ਬੈਠਦਾ ਥੋੜੀ ਉਹਦੀ ਤੇਰ ਉਹੀ ਕਰਦਾ ਤਾਂ ਇਹਨਾਂ ਨੇ ਕਿਹਾ ਸਭ ਤੁਸੀਂ ਸੁਣੋ ਸੁਣ ਕਹੇ ਸਭ ਕੋਈ ਆਨਾ ਤੁਸਨ ਕਾਂ ਹੋਏ ਆਨਾ ਤੁਸਨ ਹੋ ਜਿਵੇਂ ਲੱਗਿਓ ਰਹੇ ਟੁੱਟੇ ਹੀ ਨੂੰ ਉਹ ਆ ਜਾਗਦਾ ਸਤਿਗੁਰ ਜਾਗ ਪਾਹ ਦੇਓ ਜਾਗਤ ਜਾਗ ਰਹਿ ਲਿਵ ਰਹੇ ਉਹ ਜਾਗਦਾ ਹੁੰਦਾ ਐਵੇਂ ਨਹੀਂ ਜਾਗਦਾ ਹੈ ਉਹ ਤੂੰ ਕੋਈ ਜਾਗ ਜਾ ਕਹੀਦਾ ਹੁੰਦਾ ਹਾਂਜੀ ਹਾਂਜੀ ਜਾਗਤ ਜਾਗ ਰਹਿ ਲਿਵ ਲਾਏ ਗੁਰ ਨਾ ਖਾਈ ਜਿਹੜਾ ਜਾਂਦੇ ਪਰਚੇ ਤੇ ਰਹੇ ਇਹ ਸ਼ਬਦ ਵਿਚਾਰ ਤੇ ਜੁੜਿਆ ਰਹੇ ਉਹ ਕਾਲ ਖੰਦਾਈ ਨਹੀਂ ਹਰ ਹਰ ਨਾਮ ਜਿ ਪਰਤੇ ਆ ਕਚਨ ਕਹੇ ਜਮਕਾਲ ਕਾਂਦ ਕਮਨ ਤਨ ਸੁਖ ਵਸੇ ਅੰਤੈ ਗੋਪਾਲ ਜਿਵੇਂ ਖਾਜੂਗਾ ਕਾਲ ਕਹਿੰਦੇ ਜੀ ਸ਼ਬਦ ਵਿਚਾਰ ਜੁੜਿਆ ਰਹੇ ਪਤਾ ਹੀ ਨਹੀਂ ਜਾਂਦਾ ਸਰੀਰ ਐ ਛੁੱਟ ਜਾਂਦਾ ਜਿਵੇਂ ਸੱਪ ਕਾਂਜੀ ਛੱਡ ਜਾਂਦਾ ਜਿਤੇ ਆਨੂਗ ਸਰੀਰ ਤੇ ਉਸ ਵੇਲੇ ਤਾਂ ਸਰੀਰ ਵੱਲੋਂ ਉਹ ਹੋ ਤਾਂ ਜਾਊਗਾ ਜਸਰੀਤ ਹੀਰਿਓ ਜੁੜਿਆ ਹੈ ਤਿਰਕੁਟੀ ਜਿਹੇ ਹੀਓ ਜੁੜਿਆ ਹੈ ਹਾਂਜੀ ਅਤੀਤ ਪਏ ਮਾਰੇ ਬਹਿرائی ਪਰਉਣਾ ਤਾਂ ਨਾਨਕ ਤੈ ਲਿਵ ਲਾਈ ਅਤੀਤ ਪਏ ਮਾਰੇ ਬਹਿرائی ਅਜੇ ਨੇ ਨਾ ਇਥੇ ਮਾਇਆ ਚ ਬੰਨ ਕੇ ਰੱਖਣ ਵਾਲੇ ਵਕਾਰ ਇਹਨਾਂ ਨੂੰ ਮਾਰ ਲਵੇ ਪਹਿਲਾਂ ਸਾਰਿਆਂ ਨੂੰ ਜਿੰਨਾ ਜਿਹੜੇ ਜਿਉਂਦੇ ਨੇ ਨਹੀਂ ਉਹਨਾਂ ਚ ਜਾਣ ਦਿੰਦੇ ਇਹਨਾਂ ਦਾ ਥੋੜੇ ਹੜਕਲੀਆਂ ਲਾਈਆਂ ਨੇ ਜਿੱਥੋਂ ਤੋਂ ਬਣਿਆ ਹੋਇਆ ਆਇਆ ਨਾ ਝੋੜਿਆ ਹੋਇਆ ਤੁਸੀਂ ਕਹਿੰਦੇ ਅਸੀਂ ਆਪਣੇ ਚਲੇ ਜਾਵਾਂਗੇ ਛੱਡ ਕੇ ਸਾਤਖੰਡ ਕੇ ਵਿੱਚ ਚਲੇ ਜਾਵਾਂਗੇ ਸਾਤਖੰਡ ਤੋਂ ਆਇਆ ਸਾਤਖੰਡ ਜਾਊਗਾ ਤਾਂ ਅੱਜ ਜਿਹੜੇ ਰੋਕਣ ਵਾਲੇ ਨੇ ਮਾਰ ਲਵੇ ਸਾਤਖੰਡ ਦੇ ਜਿਹੜੇ ਰਾਹ ਦੇ ਰੋੜੇ ਨੇ ਬਣੇ ਹੋਏ ਉਹਨਾਂ ਨੂੰ ਮਾਰ ਲਵੇ ਪਹਿਲਾਂ ਉਹਾਰੇ ਗਿਆਨ ਨੇ ਰੁਕਣ ਵਾਲੇ ਨੇ ਇਹਨਾਂ ਨੂੰ ਮਾਰ ਲਵੇ ਜਿਹੜੀ ਮਤਾਂ ਰੋਕਣ ਵਾਲੀਆਂ ਨੇ ਇਹਨਾਂ ਨੂੰ ਕਹਿੰਦਾ ਮਾਰ ਨਾਨਕ ਬੇਨਤੀ ਕਰਦਾ ਲੈ ਕਹਿੰਦੇ ਭਾਈ ਤਾਂ ਲੱਗੂਗੀ ਮਾਰੇ ਕਹਿੰਦੇ ਕਿ ਪ੍ਰਣਾਪਤ ਕਹਿੰਦਾ ਤਾਨੂੰ ਫੇਰੋ ਵੀ ਐਂ ਨਾ ਕਰਨ ਨੂੰ ਸਵਾਰ ਕਰਦਾ ਨਾਨਕ ਅੱਛਾ ਪਾਸੇ ਵੀ ਲੈ ਜਾ ਚੰਗੀ ਗੱਲ ਦੱਸੇ ਤਾਂ ਜਦ ਪੈਂਦੀ ਹੈ ਨਾ ਥੋੜੀ ਜੀ ਇਹਨਾਂ ਤੇ ਹੰਕਾਰ ਤੇ ਛੱਟ ਫੇਰ ਕਹਿੰਦੇ ਇਹ ਹੰਕਾਰੀ ਹੈ ਸਾਡੇ ਹੰਕਾਰ ਤੇ ਛੱਟ ਮਾਰ ਠੀਕ ਹੈ ਜੀ ਇੱਥੇ 15ਵੀਂ ਪੌੜੀ ਸਮਾਪਤੀ ਹੈ ਜੀ ਹਾਂਜੀ 16ਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ ਦੁਬਾਰਾ ਦੁਆਦਸੀ ਤੇ ਆਇਆ ਜੀ ਦੁਆਦਸੀ ਦਇਆ ਦਾਨ ਕਰ ਜਾਣਾ ਬਾਹਰ ਜਾਤੋਂ ਭੀਤਰ ਆਣਾ ਦੁਆਦਰਥੀ ਬਾਲਵੇਂ ਨੰਬਰ ਦੀ ਇੱਕ ਗੱਲ ਹੋਰ ਹੈ ਕਹਿੰਦੇ ਦੁਆ ਹੋਰ ਦੂਜੀ ਦਇਆ ਦਾਨ ਕਰ ਜਾਣਾ ਦਇਆ ਦਾਨ ਕੀ ਹੈ ਦਇਆ ਕੀ ਹੈ ਦਾਨ ਕੀ ਹੈ ਇਹਨੂੰ ਜਾਣ ਲਵੇ ਕਾੜਾ দান ਕਰਨਾ ਦਇਆ ਕੀ ਹੁੰਦੀ ਹੈ ਦਇਆ ਦਾ ਆਂਦੀ ਜਾਣਕਾਰੀ ਲੈ ਲੋ ਕੀ ਹੁੰਦਾ ਦਇਆ ਜਾਣੇ ਜੀ ਕੀ ਕੁਛ ਪੁਰਨ दान ਕਰੇ ਉਹ ਜੀ ਵਾਸਤੇ ਦਇਆ ਕਰੋ ਜੀ ਵਾਸਤੇ ਦਾਨ ਕਰੋ ਸਰੀਰ ਤੇ ਭੁੱਖੇ ਤੇ ਪੈਰ ਲੰਗੇ ਨਜੁੱਤੀ ਲੈ ਲੋ ਇਹਨੂੰ ਜੀ ਦੀ ਦਇਆ ਨਹੀਂ ਹੈ ਇਹ ਸਰੀਰ ਤੇ ਦਇਆ ਮਾਇਆ ਜੀ ਦੇ ਉਹ ਨੂੰ ਜੰਮਣ ਮੰਨ ਤੇ ਕੱਢੋ ਬਾਹਰ ਇਹ ਹੈ ਜੀ ਦੀ ਦਇਆ ਉਹਨੂੰ ਸੱਚ ਦਾ ਗਿਆਨ ਦੋ ਗੁਰਮਤ ਦਾ ਗਿਆਨ ਦੋ ਫੇਰ ਕੋ ਨਦਾਨ ਹੈ ਉਹ ਨਾਮਦਾਨ ਨਿਸ਼ਾਨਤਾ ਨਹੀਂ ਹੈ ਨਾ ਗੁਰੂਗੋਏ ਨਾਮਦਾਨ ਨਾਮਦਾਨ ਦਾਨ ਆਟੇ ਉੱਤੇ ਖਾਣ ਪੀਣ ਦਾ ਹੀ ਦਾਨ ਹੈ ਖਾਣ ਦਾ ਹਾਂਜੀ ਬਾਹਰ ਜਾਤੋਂ ਭੀਤਰ ਆਣ ਜਾਂਦਾ ਨਾ ਧਿਆਨ ਪਦਾਰਥਾਂ ਬਾਰੇ ਤਾਂ ਅੰਦਰ ਰਹੂਗਾ ਇਹ ਦਿਆਅ ਔਰ ਦਾਨ ਨੂੰ ਜਾਣ ਲਈਏ ਸਮਝ ਲਈਏ ਕੀ ਹੁੰਦਾ ਮੰਗਣਾ ਕੀ ਹੈ ਨਾ ਮੰਗਣਾ ਹੋਰ ਵੀ ਕੁਝ ਮੰਗਣਾ ਇਹੀ ਤੇਆ ਦਿਆ ਦਾ ਨਾਮ ਦੇ ਫਿਰ ਦੇਖਾਂ ਭਲਾ ਕਿਵੇਂ ਚੱਲਿਆ ਜਾਊ ਬਾਹਰ ਧਿਆਨ ਬਾਹਰ ਧਿਆਨ ਚਾਹ ਜਾਂਦਾ ਜਾਂ ਬਾਹਰੋਂ ਮੁੰਡਾ ਪੁੱਤ ਮੰਗਦਾ ਹੈ ਇਹ ਮੰਗਦਾ ਸੰਸਾਰੀ ਸੁੱਖ ਮੰਗਦਾ ਹੈ ਕੋਈ ਕਾਰ ਮੰਗਦਾ ਹੈ ਕੋਈ ਕੁਝ ਮੰਗਦਾ ਹੈ ਪਦਾਰਥਾ ਬਾਹਰਲੇ ਮੰਗਦਾ ਹਾਂਜੀ ਕਿਉਂਕਿ ਚੇਤਨ ਦੀ ਦਇਆਰ ਚੇਤਨ ਦਾ ਦਾਨ ਜਾਣੇ ਗੱਲ ਤਾਂ ਸਾਰੀ ਕੇਸ ਦੀ ਹੋ ਰਹੀ ਹੈ ਗੁਰਬਾਣੀ 'ਚ ਦੁਆ ਹੈ ਹੀ ਨਹੀਂ ਇਹਦਾ ਲਿਆ ਬਾੜਿਆ ਇਹਨਾਂ ਨੇ ਜਾਣ ਕੇ ਪਰ ਉਹਨੇ ਲੈ ਕੇ ਬਾਹਰ ਜੋਗੀਆਂ ਨੂੰ ਵੀ ਇਸ ਗੱਲ ਦਾ ਭਰਮ ਸੀਗਾ ਹੈ ਉਹ ਜੋਗੀ ਦਾ ਵਿਚਾਰੇ ਸਰੀਰ ਨਾਲ ਜੁੜੇ ਓਕਾਰ ਬਾੜ ਛੱਡ ਕੇ ਰਾਜਾਂ ਦੇ ਜਨਾਤੇ ਰੋਗਨ ਰਾਜੇ ਕਰਨ ਪੜਾ ਇੱਕ ਨਾਮ ਉਹਨੇ ਤੇ ਹੋਰ ਪੰਗਾ ਪਾਟ ਅਜੱਪਾ ਜਾਪ ਘਹਿਤਾ ਤੂੰ ਕਰੋ ਅਜੱਪਾ ਜਾਪ ਉਹ ਕਹਿੰਦੇ ਜਪਣ ਵਾਲਾ ਜਾਪ ਹੈ ਹੀ ਨਹੀਂ ਲੈ ਲੋ ਫਾਇਵੜਤਾ ਅਜਾ ਪਾ ਜਾਲ ਦੱਸੋ ਕੀ ਹੁੰਦਾ ਹੈ ਅਜਾ ਪਾ ਜੋ ਕੋਈ ਨਹੀਂ ਜਾਂਦਾ ਹੈ ਜਿਵੇਂ ਲੋਕ ਜਪਦੇ ਨੇ ਸੰਸਾਰ ਦੇ ਵਰਤੀ ਵਰਤ ਕਾਮ ਕਾਮਨਾ ਤਿਆਕੇ ਕੋਈ ਛੱਦ ਸਭ ਤਿਆਕੇ ਫੇਰ ਮਾਇਆ ਦੇ ਵਰਤ ਰੱਖੇ ਉਹ ਪਹਿਲਾਂ ਵਰਤ ਦੀ ਗੱਲ ਕੀਤੀ ਹੈ ਇਕਾਦ ਦੀ ਇਕਾਦ ਅਸੀਂ ਨੇ ਵਰਤ ਦੀ ਗੱਲ ਕੀਤੀ ਦੁਬਾਰਾ ਫੇਰ ਹੋਰ ਗੱਲ ਕੀਤੀ ਹੈ ਦੁਆਦ ਅਸੀਂ ਜਾ ਕੇ ਕੋਈ ਸੰਸਾਰ ਦੀ ਕਾਮਨਾ ਨਾ ਰੱਖੇ ਵਰਤ ਰੱਖਣ ਵਿੱਚ ਜਿਸ ਦਾ ਅੰਦਰੇ ਹੈ ਜੇ ਬਾਹਰਲੀ ਕਾਮਨਾ ਕੋਈ ਕਾਮਨਾ ਹੈ ਇਹਨਾਂ ਨੇ ਤਾਂ ਚਾਰ ਪਦਾਰਥਾਂ 'ਚ ਕਾਮਨਾ ਬਾੜ ਲਈ ਤਾਂ ਬਾੜ ਲਿਆ ਦੇ ਕਾਮ ਸਾਹਮਣੇ ਮੰਮੇ ਨੂੰ ਓਮਕੜਾ ਹੈ ਬਾੜ ਲਿਆ ਕਰਮ ਅਰਥ ਕਾਮ ਜੇ ਕਾਮਨਾ ਹੈ ਮੁਕਤੀ ਕਿਤੇ ਉੱਥੇ ਇਹਨਾਂ ਚਾਰ ਪਦਾਰਥਾਂ 'ਚ ਬਾੜ ਹੋਇਆ ਤਾਂ ਨਹੀਂ ਬਾੜਿਆ ਹੈ ਚਾਰ ਪਦਾਰਥਾਂ 'ਚ ਅਦਬ ਚਰਨਾਲੀ ਸੀ ਨਾ ਬਰਾਮੜੀ ਆ ਅਧਪ ਚਰਨਾਲੀ ਪੇ ਤੇ ਨੇ ਸਾਰੀ ਆਪਾ ਵਿਰੋਧਾ ਪਾਉ ਸਾਂ ਠੀਕ ਐ ਸਾਰੇ ਇਹਨਾਂ ਚ ਅਜਾਪਾ ਜਾਪ ਜਪੈ ਮੁਖ ਨਾਮ ਮੁਖੀ ਨਾਮ ਮੁਖ ਦਵਾਰਾ ਨਹੀਂ ਹੈ ਮੁਖ ਸਭ ਦਾ ਮੁਖੀ ਹੈ ਅਜਾਪਾ ਜਾਪ ਜਪਾ ਹੈ ਜਪਾਜਪ ਜਪਾ ਜਿਹੜਾ ਜਪਿਆ ਨਹੀਂ ਜਾਂਦਾ ਨਾਨਕ ਗੁਰਮੁਖ ਨਾਮ ਇੱਕ ਵਾਰ ਸਮਝਣਾ ਦੀ ਗੱਲ ਹੈ ਇਹ ਇੱਕ ਵਾਰ ਸਮਝ ਲਵੇ ਜੇ ਫਿਰ ਉਹ ਸਮਝਿਆ ਹੋਇਆ ਜਪਾ ਜਾਪੇ ਮੁਖੀ ਨਾਮ ਜਿਵੇਂ ਵੇਦਾ ਨਾਮ ਉੱਤਮ ਉਹ ਜਿਹੜਾ ਉੱਤਮ ਨਾਮ ਹੈ ਉਹ ਇੱਥੇ ਉਹ ਮੁਖੀ ਨਾਮ ਕਹਿੰਦਾ ਇਹਨਾਂ ਨੇ ਅਰਥ ਕਰਤਾ ਮੁਖ ਦਵਾਰਾ ਮੁਖ ਦਵਾਰਾ ਜਾਪ ਰਿਹਾ ਇਹਨੂੰ ਫੇਰ ਜਪਿਆ ਜਾਂਦਾ ਇਹ ਮੁਖਰੋ ਅਰਥ ਕਰੋਗੇ ਜਪਾਜ ਨਹੀਂ ਬਣਦਾ ਫਿਰ ਉਹ ਜਿੰਨੀ ਜਪ ਅਜਾਬਾਜਾਪ ਬੰਸਰਦਾ ਇਹ ਅਜਾਬਾਜਾਪ ਹੈ ਇਥੇ ਮੁਖ ਮੁਖ ਦਵਾਰਾ ਨਹੀਂ ਹੈ ਸਭ ਦਾ ਮੁਗੀ ਨਾਮ ਨਾ ਨਾਮ ਸਾਰੀਆਂ ਮਤਾਂ ਦਾ ਕਾਲ ਹੈ ਇਹ ਮੋਤਾੰਤ ਸਾਰੀਆਂ ਮਤਾਂ ਨੂੰ ਅੰਤ ਕਰਨ ਵਾਲਾ ਕੇਵਲ ਹਰ ਨਾਮ ਨਾਮ ਆ ਤਾਂ ਸਾਰੀਆਂ ਮਤਾਂ ਨੂੰ ਫੇਲ ਕਰ ਦਿੰਦਾ ਹੈ ਉਹਨਾਂ ਦੀ ਖੋੜ ਦੱਸ ਦਿੰਦਾ ਉਹਨਾਂ ਦੇ ਵਿਸ਼ਵਾਸ ਨਹੀਂ ਨੰਦੋ ਸਰ ਜੰਤੋ ਦਾ ਆਪੇ ਖਤਮ ਹੋ ਗਈ ਇਹ ਉਹ ਚੇਤਨ ਸੱਤਾ ਦੀ ਗੱਲ ਆ ਜਾਂਦੀ ਹੈ ਨਾ ਰਹਿਣਾ ਫਿਰ ਇਹ ਉਹ ਅਰਥ ਜੇ ਕੱਪ ਦੇਣਗੇ ਉਹੀ ਨਹੀਂ ਉਹ ਆਖਰੀ ਨਹੀਂ ਆਪਾਂ ਨੇ ਨਹੀਂ ਜਿਹੜਾ ਬੁੱਧੀ ਨਾਲ ਜਾਪਿਆ ਜਾਂਦਾ ਬੁੱਧਿਰਮੰਦ ਹੈ ਨਹੀਂ ਉਹ ਮੁਖ ਉਹਨਾਂ ਨੇ ਅਰਥ ਕਰਨਾ ਜੱਪਾ ਜਾਪ ਜਪੇ ਮੁਖੀ ਨਾਮ ਆਹ ਮੁਖੀ ਨਾਮ ਹੈ ਜੋ ਸਾਰਿਆਂ ਉਹ ਜਪਾ ਜਾ ਸਮਝਣ ਦਾ ਵਿਸ਼ਾ ਸਮਝਣਾ ਨਹੀਂ ਜਪਣਾ ਸਾਡੇ ਜਪ ਨੂੰ ਓਕੜ ਜਿਹੜਾ ਜਿਤੋਂ ਜਪਜੀ ਸਾਹਿਬ ਸ਼ੁਰੂ ਹੁੰਦੀ ਹੈ ਤਾਂ ਉਹ ਜਾਪ ਹੈ ਜਿਹੜਾ ਉਹਨੂੰ ਓਕੜ ਹੈ ਉਹ ਜਪਦਾ ਅਸਾਂ ਕਹਿੰਦਾ ਤਾਂ ਆਹ ਅਸਾਂ ਖਿਆਪਰ ਜਿੰਨੀਆਂ ਮੱਤਾਂ ਨੇ ਆਡਾ ਡੋਣਾ ਨੇ ਸਾਡਾ ਕਿਹੜਾ ਹੈ ਸਾਡੇ ਆਲਾ ਮੁਖੀ ਹੈ ਸਮਝਦਾ ਗੁਰਮਤਿ ਨਾਮ ਹੈ ਜੀ ਹਾਂ ਗੁਰਮਤ ਵਾਲਾ ਜਿਹੜਾ ਜਾਪ ਹੈ ਨਾ ਹਾਂਜੀ ਉਹ ਹੋਰ ਆ ਦੂਜੀਆਂ ਮਤਾਂ ਦੇ ਹੋਰ ਮੈਂ ਸੁੱਚ ਸੰਜਮ ਸਾਚ ਪਛਾਨੈ ਦੇ ਵਿੱਚ ਜੋਤ ਇੱਕੋ ਹੀ ਆ ਤੀਨ ਭਵਨਾਂ ਇੱਕ ਜੋਤੀ ਜੋਤ ਇੱਕੋ ਜਾਣੈ ਤੇ ਨਾ ਭਵਨਾਂ ਚ ਜੇ ਤਿੰਨਾਂ ਭਵਨਾਂ ਚ ਇੱਕ ਨੂੰ ਜਾਣ ਲਵੇ ਸਭ ਸੁੱਚ ਸੰਜਮ ਸੱਚ ਪਛਾਣੇ ਸਾਰੇ ਸਚਿਆਰ ਸੰਜਮਰ ਕੋਲ ਬੈਠੋ ਦੇ ਸੰਜਮਰ ਸੋਚਦੀ ਫਿਰ ਉਹਨੂੰ ਲੋੜ ਨਹੀਂ ਆ ਜਿਹੜੇ ਕਹਿੰਦੇ ਨੇ ਨਾ ਜਾ ਦੇ ਕੇ ਚੌਂਕ ਚ ਕੱਢੀਕਾਰ ਉਪਰ ਆਏ ਬਕੇ ਉਹ ਚੌਂਕੇ ਚ ਕਦੀ ਫੇ ਲੋੜ ਨਹੀਂ ਹੈਗੀ ਬਾਹਰ ਦੀ ਸੱਚ ਪਿੱਟਦੀ ਲੋੜ ਨਹੀਂ ਹੈ ਨਾ ਬਾਹਰ ਲੈਣਾ ਸੰਜਮ ਦੀ ਲੋੜ ਹੈ ਜਿਹੜੇ ਲੈ ਨਹੀਂ ਫਿਰਦੇ ਬਾਹਰ ਸੱਚ ਨੂੰ ਪਛਾਣ ਲੈਂਦਾ ਜਿਹਨੇ ਸੱਚ ਨੂੰ ਪਛਾਣ ਲਿਆ ਸਭ ਸੋਚਰ ਸਾਰੇ ਪ੍ਰਕਾਰ ਦੀ ਸੱਚ ਆਸਾਰੇ ਪ੍ਰਕਾਰ ਦੇ ਸੰਜਮੋ ਦੇ ਕੋ ਆਗੇ ਉਹਦੇ ਵਿੱਚੇ ਆ ਜਾਂਦੇ ਨੇ ਸਾਡਾ ਦਾ ਪ੍ਰਚਾਰ ਰਹਿਣ ਗੁਰਦੁਆਰੇ ਅੰਦਰ ਸਾਡੇ ਦਾ ਪ੍ਰਭਾਵ ਉਹੀ ਹਿੰਦੂ ਮੱਧaithe ਆ ਹਨ ਉਹ ਜੋ ਰਹਿ ਤਾਂ ਠੀਕ ਹੈ ਜੀ ਇੱਥੇ 16ਵੀਂ ਪੌੜੀ ਸਮਾਪਤੀ ਹੈ ਜੀ ਹੋਜੀ ਕਾਰਮੀ ਸ਼ੁਰੂ ਕਰਦੇ ਹਾਂ ਜੀ ਫੇਰ ਤਰਵਰ ਸਮੁੰਦ ਕਿਨਾਰਾ ਅੰਮ੍ਰਿਤ ਮੂਲ ਸਿਖਰ ਲਿਵ ਤਾਰ ਹੈ ਕਹਿੰਦੇ ਤੇਰਵੀਂ ਗੱਲ ਇਹ ਹੈ ਮੈਂ ਆਹ ਤੇਰਵੀਂ ਕਰਤੀ ਆਪਾਂ ਕਹਿੰਦੇ ਨੇ ਹਾਂਜੀ ਜਗ ਤੋਂ ਤੇਰ ਤੇਰਵੀਂ ਹੈ ਜਿਆਦਾ ਹੀ ਨਿਆਰੀ ਉਲਟੀ ਕਰਤੀ ਕਹਿੰਦੇ ਰੁੱਖਾ ਕਿਹਦੇ ਸਮੁੰਦਰ ਦੇ ਕੰਢੇ ਤੇ ਬਨਾਰੀ ਦੇ ਪੇੜ ਹੁੰਦੇ ਸਮੁੰਦਰ ਦੇ ਕੰਢੇ ਤੇ ਹਾਂਜੀ ਉਹ ਨਾਰੀਅਲ ਦਾ ਕਾਹਨ ਭਲੀ ਆਦਮੀ ਵਾਲੀ ਭਲੀ ਹੈ ਈ ਦੀ ਤੇ ਬਰਾਬਰ ਬਲੀ ਬਣੀ ਗਈ ਹੈ। ਹਾਂਜੀ ਤਾਂ ਨਾਰੀ ਮੇਲੇ ਭੰਦੇ ਆ ਇਹ। ਇਹਨਾਂ ਦੀ ਪਹਿਲਾਂ ਨਾਲ ਮੰਨੀ ਹੋਈ ਹੈ। ਤੇ ਖੜਾ ਹਿਰਦੇ ਵਿੱਚ ਹੈ ਤੇ ਹਿਰਦੇ ਵਿੱਚ ਸਮੁੰਦਰ ਕੰਢੇ ਤੇ ਹੋਰ ਕੀ ਹੈ। ਇਹ ਹੈ। ਸਮੁੰਦਰ ਦਾ ਕਿਨਾਰਾ। ਇਹ ਸੁਖ ਸਾਗਰ ਦਾ ਕਿਨਾਰਾ ਹੈ ਜਿਹੜਾ ਸੰਤੋਖ ਦਾ ਰਖ ਹੋਇਆ ਇਹ ਉੱਥੇ ਹੀ ਹੋਇਆ ਕਿਨਾਰੇ ਤੇ ਹਾਂਜੀ ਅੰਮ੍ਰਿਤ ਮੂਲ ਸਿਖਰ ਲਿਵ ਤਾਰ ਹੈ ਇਹਦੇ ਮੂਲ ਜੜਜ 'ਚ ਤਾਂ ਅੰਮ੍ਰਿਤ ਪਿਆ ਹੈ ਹਿਰਦੇ 'ਚ ਅੰਮ੍ਰਿਤ ਹੈਗਾ ਜਿਹੜਾ ਸੰਤੋਖ ਦਾ ਰਖ ਹੁੰਦਾ ਹੈ ਮੂਲ ਨਾਲ ਅੰਮ੍ਰਿਤ ਹੁੰਦਾ ਥੱਲੇ ਅੰਮ੍ਰਿਤ ਉਹਨੂੰ ਮਿਲਦਾ ਰਹਿੰਦਾ ਹੈ ਸਿਖ ਸਿਖਰ ਦੀ ਹੈ ਉੱਪਰ ਦੀ ਹੈ ਉੱਪਰ ਧਮਾਕੀ ਹੈ ਲਿਵ ਤਾਰ ਜੁੜੀ ਹੋਈ ਹੈ ਧਿਆਨ ਜੁੜਿਆ ਹੋਇਆ ਇਹ ਅੰਦਰ ਮੋਗੜਾ ਹੈ ਥੱਲੇ ਅਮਰਤਾ ਹੈ ਤਾਂ ਲੱਗ ਜੁੜਦੀ ਹੈ ਹਿਰਦੇ ਚ ਭਰਪੂਰ ਅਮਰਤਾ ਹੈ ਨਹੀਂ ਨਹੀਂ ਜੁੜਦੀ ਡਰ ਡਰ ਮਰੈ ਨਾ ਬੁੱਢਾ ਮਰੈ ਪਤ ਖੋਇ ਬਗੋਂ ਦੇ ਧੈਰੇ ਵਿੱਚ ਮਰ ਕੱਲਦਾ ਹੈ ਧੈ ਨਾਲ ਮਰਦਾ ਹੈ ਨਾ ਬੁੱਢੇ ਕੋਲ ਕੋਹਨ ਚ ਕੋਈ ਨਹੀਂ ਡੁੱਬਿਆ ਉਹਨਾਂ ਚੋਰੀਆਂ ਸਮੁੰਦਰ ਡੁੱਬਦਾ ਕੋਈ ਜਿਹੜਾ ਹੁਕਮ ਦਾ ਟਾਂ ਲੱਖਦਾ ਉਹ ਹੁਕਮ ਨੂੰ ਨਹੀਂ ਮਾਰਦਾ ਉਹ ਨਹੀਂ ਡੁੱਗਦਾ ਹੈਗਾ ਉਦੋਂ ਦੀ ਖੱਲ ਵੀ ਆਉਂਦੀ ਹੈ ਰੁੱਕ ਕੇ ਖੜੇ ਹੁੰਦੇ ਨੇ ਉਹਨੂੰ ਕੁਝ ਨਹੀਂ ਕਹਿੰਦਾ ਉਹ ਲੀਡਰ ਬੂਡ ਹੈ ਜਿਹੜਾ ਲੀਡਰ ਹੋ ਜਾਂਦਾ ਉਹ ਡੁੱਬ ਜਾਂਦਾ ਮਰਿਆ ਪਤ ਕੋਈ ਮਰ ਜਾਂਦਾ ਜਿਹੜਾ ਹੁਕਮ ਦੀ ਪਾਏ ਨਹੀਂ ਰੱਖਦਾ ਕਹਿੰਦੇ ਉਹ ਮਰਦਾ ਡੁੱਬ ਕੇ ਉਹਨੂੰ ਕਹਿੰਦਾ ਹੈ ਪਰ ਮਰਦਾ ਵੀ ਹੈ ਪਤਵੀ ਨਹੀਂ ਰਹਿੰਦੀ ਪਤਵੀ ਖੋ ਕੇ ਜਾਂਦਾ ਯਾਰਾ ਹਕਮਦਾਰੀ ਰਾਦਾ ਨੂੰ ਪੇਪਰ ਤੇ ਫੜ ਲਈਆਂ ਆ ਤੇ ਹਾਂਜੀ ਦਰ ਮਹਿ ਕਰ ਕਰ ਮਹਿ ਡਰ ਜਾਣਾ ਤਖਤ ਨਿਵਾਸ ਸੱਚ ਮਨ ਪਾਣਾ ਦਰ ਮਹਿ ਕਰ ਇਹ ਹੁਕਮ ਦੇ ਵਿੱਚ ਹੁਕਮ ਨੇ ਲੜਕੇ ਘਾਰਾ ਤੇਰਾ ਫਿਰਦਾ ਜਿਹੜਾ ਹੈ ਉੱਥੇ ਰਹੇ ਜਾਂ ਫਿਰ ਕੁਟੀ ਹੈ ਹਿਰਦੇ ਚੱਲ ਰਹੀ ਹੈ ਕਹਿਣ ਦਾ ਮਤਲਬ ਇਹ ਹਿਰਦਾ ਘਰ ਹੈ ਉੱਥੇ ਹੀ ਹੁਕਮਾਂ ਪੈਣੀ ਡਰ ਜਦ ਤਰ ਗੁੜੀ ਵਾਲਿਆਂ ਨੂੰ ਉਹਨਾਂ ਨੂੰ ਪ੍ਰਵਾਹ ਨਹੀਂ ਹੁਕਮ ਦੀ ਆਪਣੇ ਪਾਣੀ ਜਿਹੜੇ ਚੱਲਦੇ ਨੇ ਉਹ ਨਡਰ ਹੋਏ ਹੋਏ ਨੇ ਗੁਰਕੇ ਪਾਣੀ ਤੋਂ ਪਰਮੇਸ਼ਰ ਦੇ ਪਾਣੀ ਤੋਂ ਉਹ ਮਰਦੇ ਨੇ ਜਿਹੜੇ ਉਹਦੇ ਪਾਣੀ ਦੇ ਦਰਜ ਰਹਿੰਦੇ ਰਹਿੰਦੇ ਨੇ ਉਹਨਾਂ ਨੂੰ ਡਰ ਮੈਂ ਘਰ ਕਰਮ ਉਹਨਾਂ ਦੇ ਘਰ ਦੇ ਵਿੱਚ ਡਰ ਹੈ ਇਕੱਠੇ ਹੀ ਨੇ ਉਹ ਠੀਕ ਡਰ ਜਾਣ ਹਿਰਦੇ ਜੀ ਹੁਕਮ ਉਹਨਾਂ ਦੇ ਹਿਰਦੇ ਜੀ ਆ ਦੋਹੇ ਤੇ ਉਹਨਾਂ ਨੂੰ ਜਾਨਾ ਕਿੱਥੇ ਹੈ ਕਿ ਜਿਹੜੇ ਉਹ ਸਮਝ ਲਓ ਉਹ ਰਾਜ ਮਿਲ ਗਿਆ ਖਾਲਸਾ ਉਹ ਤਖਤ ਤੇ ਬੈਠਾ ਉਹ ਤਖਤ ਤੇ ਤਾਂ ਪਹਿਲਾਂ ਹੀ ਬੈਠਾ ਸੀ ਜਾਗਿਆ ਹੀ ਹੈ ਉਹ ਤਖਤ ਤੇ ਤਾਂ ਸਾਰੇ ਹੀ ਬੈਠੇ ਨੇ ਸੁਪਨਾ ਦੇਖਦੇ ਨੇ ਉਹ ਦਿਮਾਗ ਵਿੱਚ ਜਿਹੜੇ ਸੁਪਨਾ ਦੇਖਦੇ ਨੇ ਤੇ ਨੇ ਜਿਹੜੇ ਜਾਗਦੇ ਨੇ ਉਹ ਤਖਤ ਤੇ ਬੈਠੇ ਨੇ ਰਾਜੇ ਨੇ ਤਖਤ ਤੇ ਨਿਵਾਸ ਸੱਚੇ ਮਨ ਭਾਣਾ ਉਹ ਤਖਤ ਤੇ ਨਿਵਾਸ ਹੈ ਸੱਚ ਉਹਦੇ ਮਨ ਨੂੰ ਉਹਦੇ ਮਨ ਨੂੰ ਸੱਚ ਭੌਂਦਾ ਵਰਨਾ ਚੰਗਾ ਲੱਗਦਾ ਸੁਪਨੇ ਵਾਲਿਆਂ ਨੂੰ ਸੱਚ ਨਹੀਂ ਚੰਗਾ ਲੱਗਦਾ ਝੂਠਾ ਝੂਟੀ ਦੁਨੀਆ ਨੂੰ ਇਹਨਾਂ ਨੇ ਸੱਚ ਬੰਦੇ ਆ ਨੂੰ ਸੱਚ ਚੰਗਾ ਨਹੀਂ ਲੱਗਦਾ ਹਾਂਜੀ ਠੀਕ ਹੈ ਜੀ ਇੱਥੇ 17ਵੀਂ ਸਮਾਪਤੀ ਹੈ ਜੀ 18ਵੀਂ ਸ਼ੁਰੂ ਕਰਦੇ 14 ਚੌਥੇ ਥਾਵੇਂ ਲਹਿ ਪਾਵੈ ਰਾਜਸ ਤਾਮਸ ਸਤ ਕਾਲ ਸਮਾਵੈ 14ਵੀਂ ਗੱਲ ਇਹ ਹੈ ਚੌਥੇ ਥਾਮਾ ਉਸ ਤਾਵੇਂ ਚੌਥੀ ਅਵਸਥਾ ਚ ਰਹਿ ਜਾਂਦਾ ਲਹਿ ਪ੍ਰਾਪਤ ਕਰਕੇ ਚੌਥਾ ਯੁਗ ਕਿਹੜਾ ਚੌਥਾ ਯੁਗ ਹੈ ਸਤ ਯੁਗ ਚੌਥੀ ਅਵਸਥਾ ਤੁਰਿਆ ਅਵਸਥਾ ਇਹ ਛੱਡ ਕੇ ਪਿੰਨੇ ਲੋਕ ਚੌਥੇ ਲੋਕ ਵਿੱਚ ਚਲੇ ਜਾਂਦੇ प्राप्ति हो जाती है और थे होते फिर बस जाया जाके या होते लए पावै वो के होते अवस्था दी तुरिया पद दी प्राप्ति का लंदा राजस तामस सत का काव है रजो तमो और सतो गुड़ी जे तन्ना दे तन्ने काल दे विच ने व्यवस्थावां है रजो गुण तमो गुण और सतो गुण इना एक काल दे अंदर ने ਉਹ ਸੁਖ ਸਾਧਨ ਹੈ ਭਗਤ ਸਾਧਨ ਅੰਤਰੀ ਸਮਝ ਜਾਂਦਾ ਹੈ ਇਹਦੇ ਇਹਨਾਂ ਦਾ ਦਾ ਮਿਲਦਾ ਹੀ ਨਹੀਂ ਇਹ ਤਿੰਨ ਗੁਣ ਹੋਵੇ ਜੀ ਰਾਜ ਤਾਮਸ ਗੁਣਾਂ ਦੇ ਉੱਪਰ ਉੱਠ ਜਾਂਦਾ ਹੈ ਗੁਣ ਮਿਚਾ ਖਾਈਏ ਸਾਰ ਇਹ ਤਿੰਨੇ ਗੁਣ ਖਤਮ ਹੋਦੇ ਵਾਸਤੇ ਕਿੰਨੇ ਗੁਣਾਂ ਦੀ ਕੋਈ ਵੈਲਿਊ ਨਹੀਂ ਹੈ ਇਹ ਛਤੋ ਦੇ ਵਿੱਚ ਫਸਿਆ ਨੇ ਸਾਰੇ ਸੰਤ ਨਹੀਂ ਛਤੋ ਤੇ ਤਾਂ ਹੈ ਹੀ ਨਹੀਂ ਸੰਸਾਰ ਦੀ ਕੋਈ ਮਤ ਸਤੋ ਗੁਣ ਤੇ ਗੱਲ ਨਹੀਂ ਕਰਦੀ ਰਜੂ ਤਮੋ ਤੇ ਸਤੋ ਤੋਂ ਫਿਰ ਉੱਪਰ ਉੱਠ ਜਾਨੇ ਰਾਜਾ ਕੀ ਕਹਿੰਦਾ ਰਾਜਾ ਕਹਿੰਦਾ ਰਜੋ ਗੁਣ ਦੀ ਗੱਲ ਪਾਪ ਕਰਮ ਆਪਣੇ ਦਸਾਂ ਨਾ ਦੀ ਕਰਤ ਕਰੋ ਚੰਗੀ ਨੇਕ ਕਮਾਈ ਕਰੋ ਔਰ ਖਾਓ ਪੀਓ ਐਸ਼ ਕਰੋ ਕੀ ਰਾਜੇ ਦਾ ਹੈਗਾ ਇੱਥੇ ਤੱਕ ਸਤੋਗਣ ਵਾਲੇ ਰਾਜਾ ਕਹੀ ਜਾਵੇ ਸਤੋਗਣ ਵਾਲੇ ਬਹੁਤ ਢੀਂਗੇ ਲੱਗਦੇ ਨੇ ਜਿਹਨੂੰ ਫੇਰ ਆਜ ਨੂੰ ਰਾਜਾ ਵੀ ਬੰਦੇ ਉਹ ਨੂੰ ਲਾਉਣੋਂ ਕਹਿੰਦਾ ਫਿਰ ਆਜਾ ਉਹਨੂੰ ਤਾਂ ਹੁੰਦਾ ਉੱਤੇ ਝੁਕਣਾ ਪੈਂਦਾ ਰਾਜੇ ਠੀਕ ਹੈ ਹਾਂ ਰਾਜਾ ਝੁੱਕ ਕੇ ਰਾਜੇ ਨਹੀਂ ਕਿਸੇ ਨੂੰ ਹੰਕਾਰ ਹੀ ਹੁੰਦਾ ਹਾਂਜੀ ਸੱਸੀਰ ਕੈ ਘਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਸੱਸੀਰ ਘਰ ਸੂਰ ਸਮਾਵੈ ਇਕ ਚੰਦਰਮੇ ਦਾ ਘਰ ਸੀਗਾ ਇਹ ਪਹਿਲਾਂ ਉਹ ਪਹਿਲਾਂ ਜਿੱਥੇ ਹੰਸ ਦੀ ਰਾਂ ਹੰਸ ਚੱਤ ਜਿੱਟਾ ਸੀ ਜਾਨ ਇੱਥੇ ਗਿਆ ਹੁਣ ਚਾਹੇ ਪੂਰਬਾਖੀ ਦਾ ਚੰਦਰਮਾ ਹੋਵੇ 14 ਦਾ ਪੂਰਬਾਖੀ ਦਾ ਚੰਦਰਮਾ ਕੋਈ ਨਹੀਂ ਹੁੰਦਾ ਪਰ ਹੁੰਦੀ ਦਾ ਰਾਤ ਹੈ ਹੁੰਦੀ ਦਾ ਰਾਤ ਹੀ ਜਾਂਦੀ ਹੈ ਦਿਨ ਨਹੀਂ ਮੰਨਿਆ ਜਾਂਦਾ ਜੇ ਉੱਤੇ ਸੂਰਜ ਹੀ ਨਾ 14 ਦਾ ਚੰਦਰਮਾ ਹੁੰਦਾ ਕਿੱਲੇ ਤੱਕ ਰਹਿੰਦਾ ਇਹੋ ਜਦ ਸੂਰਜ ਚੜ ਜਾਂਦਾ ਸੂਰਜ ਚੜ੍ਹੇ ਦੇ ਬਾਅਦ ਚੰਦਰਮਾ ਹੁੰਦਾ ਪਰ ਚੰਦਰਮਾ ਦਾ ਕੋਈ ਉਹਦਾ ਮਤਲਬ ਕੀ ਹੈ ਜੰਨਾ ਫੇ ਚੰਦਰਮੇ ਦਾ ਉਹ ਚੰਦਰਮੇ ਹੀ ਰੋਸ਼ਨੀ ਹੁੰਦੀ ਸੂਰਜ ਦੀ ਹੁੰਦੀ ਹੈ ਚੰਦਰਮਾ ਹੋਇਆ ਨਾ ਹੋਇਆ ਬਰਾਬਰ ਹੁੰਦਾ ਸਾਡੀ ਜਿਹੜੀ ਬੁੱਧੀ ਸੀ ਉਹ ਤਾਂੇ ਉੱਥੇ ਹੀ ਹੈਗੀ ਜਿੱਤੇ ਪਹਿਲਾਂ ਸੀ ਫਜਰ ਵਿਵੇਕ ਬੁੱਧੀ ਆ ਜਾਂਦੀ ਹੈ ਉਹਦੀ ਜਗ੍ਹਾ ਤੇ ਸਾਡੇ ਵਾਲੀ ਬੁੱਧੀ ਦੀ ਗੱਲ ਸਾਡੇ ਵਾਲੀ ਮਤ ਦੀ ਗੱਲ ਨਹੀਂ ਰਹਿੰਦੀ ਮੇਰੀ ਮਤ ਥੋੜੀ ਰਾਮ ਉਹ ਸਭ ਰਾਤ ਵੱਡਾ ਸਤਿ ਆਰ ਕਾਇਕਰ ਸੂਰ ਦਮਾਵਾ ਹੈ ਜੀ ਸੂਰ ਦੀ ਰੋਸ਼ਨੀ ਹਾਂਜੀ ਯੋਗ ਜੁਗਤ ਕੀ ਕੀਮਤ ਪਾਵੈ ਫਿਰ ਜੋਗ ਜੋਗ ਤਾ ਉਹਦੀ ਕੀਮਤ ਪਈ ਹੈ ਫਿਰ ਇਹਨੂੰ ਫਲ ਮਿਲਿਆ ਇਹ ਹੈ ਜੋਗ ਜੁਗਤ ਜੁੜਨਾ ਕਿਹਦੇ ਨਾਲ ਸੀ ਆਏ ਜੁੜਨਾ ਸੀ ਸ਼ਬਦ ਗੁਰੂ ਨਾਲ ਜੁੜਨਾ ਸੀ ਫਿਰ ਜੋਗ ਜੋਗ ਤਾ ਇਹਨੂੰ ਕਹਿੰਦੇ ਨੇ ਜੁਗਤ ਉਜੋਗ ਜੁਗ ਧੋਰੀ ਹੈ ਅੰਜਨ ਮਾਹੀ ਨਰੰਜਨ ਰਹੀ ਹੈ ਜੋਗ ਜੁਗ ਤੇ ਬਪਾਈ ਹੈ ਦੱਸਿਆ ਅਸੀਂ ਯੋਗੀਆਂ ਨੂੰ ਮਾਇਆ ਤੇ ਰਹਿੰਦੇ ਹੋਈ ਮਾਇਤੋ ਲੈਪ ਰਹੀਏ ਨਿਲੇ ਭੋਜੀਏ ਫੇਰ ਘਰ ਸੂਰ ਜਾਊਗਾ ਫੇਰ ਸਮਾਊਗਾ ਫੇਰ ਜੋਗ ਜੁਗਤੀ ਕੀ ਮਿਲੂਗੀ ਹਾਂਜੀ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਮੰਡ ਰਹਾ ਲਿਵ ਲਾਏ ਆ ਜਿਹੜੇ 14 ਲੋਕ ਤੁਸੀਂ ਕਹਿੰਦੇ ਹੋ ਨਾ ਜਾਰੇ ਖਤਮ ਹੋ ਜਾਂਦੇ ਨੇ ਫੇਰੀ ਰੰਦਾ ਕੋਈ ਵੀ ਪਤਾਲ 14 ਪਤਾਲ 14 ਨਹੀਂ ਅਕਾਲ ਸਾਰੀ ਸਮਾਗੇ ਵਿੱਚ ਇਹ ਉਹ ਤਿੰਨ ਲੋਕ ਦੇ ਵਿੱਚ ਹੀ ਦੇ ਸਭ ਕੁਝ ਇਹਨਾਂ ਨੇ ਹਜ਼ਾਰ ਹੈ ਕਹੇ ਹੈ ਜਿੰਨੇ ਮਰਜ਼ੀ ਬਣਾ ਲਓ ਤੁਸੀਂ ਇਹ ਵਿੱਚੇ ਸਮਾ ਜਾਂਦੇ ਨੇ ਬਸ ਫੇਣੀ ਹੈ ਕੋਈ ਰੰਦਾ ਮਾਇਆ ਥੋੜਾ ਜਿਹਾ ਏਰੀਆ ਸਮਾਇਆ ਇਹ ਵਿੱਚੇ ਸਮਾ ਖੰਡ ਬ੍ਰਹਮੰਡ ਖੰਡ ਔਰ ਬ੍ਰਹਮੰਡ ਰਹਾ ਅਲਬਲਾਏ ਜਿਹੜੇ ਖੰਡ ਖੰਡ ਹੋਏ ਹੋਏ ਨੇ ਬ੍ਰਹਮੰਡ ਬ੍ਰਹਮੰਡ ਕੇਤਨ ਦਾ ਨੋਇ ਖੰਡ ਬ੍ਰਹਮੰਡ ਪਰ ਭੰਡ ਨੂੰ ਬ੍ਰਮੰਡ ਕਹੀ ਜਾਂਦੇ ਨੇ ਉਪਰ ਭੰਡ ਲਾਭਦਾ ਜਿਹੜੀ ਮਾਇਆ ਹੈ ਉਪਰ ਨੂੰ ਬ੍ਰਮੰਡ ਕਹੀ ਜਾਂਦਾ ਪਰ ਭੰਡੇ ਕਾਇਫ ਕਰਿਆ ਹੋਏ ਮਾਇਆ ਬ੍ਰਮੰਡ ਚੇਤਨ ਜੋ ਬ੍ਰਹਮੰਡੇ ਸੋਈ ਪਿੰਡੇ ਇਹ ਭਰਮ ਦੇ ਆਂਡੇ ਨੂੰ ਬ੍ਰਮੰਡ ਕਹਿੰਦੇ ਨੇ ਚਾਹੇ ਬ੍ਰਹਮੰਡ ਆ ਬ੍ਰਮੰਡ ਹੁੰਦਾ ਤੇ ਇੱਥੇ ਖੰਡ ਹੁੰਦਾ ਜੋ ਅਪਰਚਲ ਕਲਯੁਗ ਇਹ ਬ੍ਰਹਮੰਡ ਖੰਡ ਹੋਇਆ ਹੁੰਦਾ ਦੋ ਟੁਕੜਿਆਂ ਹੋਇਆ ਹੁੰਦਾ ਦਾਲ ਮਨ ਕਰਕੇ ਮਨ ਅੱਡ ਹੋਇਆ ਹੁੰਦਾ ਮਨ ਭਾਇਆ ਜਾਂਦਾ ਭਾਇਆ ਵਰਤ ਲੈ ਜਾਂਦਾ ਰਾਇਆ ਨੇ ਬੁਲਾਇਆ ਇਹ ਜਿਹੜਾ ਖੰਡ ਬ੍ਰਹਮੰਡ ਸੀ ਫਿਰ ਇਹਲੇ ਬੁਲਾ ਖੰਡ ਸੀ ਇਹ ਬ੍ਰਹਮੰਡ ਹੋ ਗਿਆ ਸੀ ਫਿਰ ਬ੍ਰਹਮੰਡਾਂ ਦਾ ਫੁੱਟ ਗਿਆ ਸੀ ਖੰਡ ਤੋਂ ਪੂਰਨ ਬ੍ਰਹਮ ਹੋ ਗਿਆ ਸੀ ਪੂਰਮਨੋਂ ਤਾਂ ਫੁੱਟ ਕੇ ਲੇਵ ਲੱਗੀ ਸੀ ਫਿਰ ਇਹਦੀ ਫਿਰ ਤੇ ਖੰਡ ਜਿਹੜਾ ਬ੍ਰਹਮੰਡ ਬਣ ਗਿਆ ਹੋਂ ਖੰਡਤਾ ਰਿਹਾ ਨਾ ਨਾ ਉਹ ਜਿਹੜਾ ਮਾਨਸਿਕ ਉਹ ਤਾਂ ਖੰਡਨ ਹੋਇਆ ਉਹ ਤਾਂ ਰਿਹਾ ਨਾ ਤੇ ਖੰਡ ਤੇ ਬ੍ਰਹਮੰਡ ਚ ਆ ਗਿਆ ਉਹ ਬ੍ਰਹਮ ਦੇ ਚ ਲੀਨ ਦੀ ਤਾਂ ਲੈਵਲ ਹੈ ਆਪਣੀ ਜਗ੍ਹਾ ਠੀਕ ਬੰਦਿਆ ਚਲੋ ਉਹਦੇ ਚਾਹ ਲੈ ਤੇ ਚ ਲੱਗਿਆ ਹੋਇਆ ਸਾਹ ਲੈਣ ਚ ਇੱਥੇ 12ਵੀਂ ਕਰੀਏ ਸ਼ੁਰੂ ਹਾਂ ਹਾਂ अमावस्य चांद गुप्त रैणार बुज्जो ज्ञानी शब्द विचार वो इन्होने अमावस्या आज लिखी है कबीर ने अमावस्या पहला लिखी थी अमावस्या अपनी बात चाहिए हां जी ठीक चाहिए अमावस्या आगे कहते फिर उसके बाद फिर अमावस्या जानी है ਫੇਰ ਗੁਰੂ ਨਾਨਕ ਨੇ ਫਿਰ ਦੀਵਾ ਜਗਾਇਆ ਗਿਆਨ ਫਿਰ ਲੱਭਿਆ ਗੁਰਨਾਨਕ ਲਈ ਧਿਆਏ ਗੁਰਨਾਨਕ ਨੇ ਧਿਆਨ ਫੇੜਾਈ ਗੱਲ ਗੁਰਮਤ ਫਿਰ ਉਹਨਾਂ ਨੇ ਗੁਰਮਤ ਦੀ ਵਿਆਖਿਆ ਦੁਆਰਾ ਕੀਤੀ ਛੁਰੂ ਅਕਬੀਰ ਦੀ ਉਹ ਵਿਆਖਿਆ ਕੀਤੀ ਹੈ ਗਾਂ ਛਿੱਟੀ ਗੌੜੀ ਰਾਤ ਸੀ ਉਹਦੀ ਵਿਆਖਿਆ ਕੀਤੀ ਆ ਹੋਰ ਚੰਦ ਗੁਪਤ ਰਹਿਣਾਰ ਆਹ ਚੰਦ ਕਹਿੰਦੇ ਗੁਪਤ ਹੋ ਗਿਆ ਕਸੂਰ ਵਿੱਚੋਂ ਰਹਿਣਾਰ ਉਹ ਚੰਦਰਮਾ ਵੀ ਨਹੀਂ ਰਿਹਾ ਸੂਰਜਿ ਚ ਚੰਦਰਮੇ ਜਨਾ ਵੀ ਚੱਲਣ ਨਹੀਂ ਹੈਗਾ ਹੁਣ ਤੂ ਜਿਹੜਾ ਹੈਂਦੀ ਸੀ ਚੰਦਰਮਾ ਵੀ ਅੱਜ ਗੁਪਤ ਹੋ ਗਿਆ ਤੰਦੇ ਉਹਨਾਂ ਵੇਲੇ ਚਾਨਣ ਕੋਈ ਦੱਸ ਰਿਹਾ ਪੁੱਝੋ ਗਿਆਨੀ ਸ਼ਬਦ ਵਿਚਾਰ ਕਹਿੰਦੇ ਹੁਣ ਗੱਲ ਪੁੱਝੋ ਮੈਂ ਕੀ ਕਹੀਆ ਸ਼ਬਦ ਵਿਚਾਰ ਕਰਕੇ ਕੁਰਬਾਨੀ ਚਾਰੋਂ ਕਿਹੜੇ ਮੈਂ ਗੱਲ ਕਰਦਾ ਕਿਹੜਾ ਗਹਿਨਾਰ ਹੈ ਕੀ ਮੈਂ ਕਹਤਾ ਇਹਨੂੰ ਪੁੱਝੋ ਕੋਈ ਗਿਆਨਵਾਨ ਬੁੱਝੂ ਮੈਂ ਕੀ ਕਹਤਾ ਇਹ ਤਾਂ ਬਾਹਰ ਲਈ ਹੱਤ ਕਰਨਗੇ ਵਿਦਵਾਨ ਦੇ ਵਸਦੀ ਗੱਲ ਨਹੀਂ ਸੀ ਬੁੱਝਣਾ ਬੁੱਝਣਾ ਸਿੱਖ ਗੁਰਮਖੰਦ ਦੇ ਪਾਸ ਦੀ ਗੱਲ ਗਿਆਨੀ ਦੀ ਗੱਲ ਹੈ ਬੁੱਝਣਾ ਵਿਦਵਾਨ ਦੇ ਮਤਲਬ ਨਹੀਂ ਗਿਆਨ ਵਾਸਤੇ ਪੜਦਾ ਜਿਹਨੇ ਪੜ ਕੇ ਬੁੱਝ ਲਿਆ ਹੋ ਗਿਆ ਹਾਂਜੀ ਸਸਿਰ ਗगन ਜੋਤ ਤਹਿ ਕਰ ਵੇਖੇ ਕਰਤਾ ਸੋਈ ਹਾਂ ਗਗਨ ਜੋਤ ਤੇਹਲੋਈ ਤੇਨਾ ਲੋਕਾਂ ਦੇ ਵਿੱਚ ਜਿਹੜੀ ਜੋਤ ਹੈ ਉਹ ਚੰਦਰਮੇ ਦੀ ਹੈ ਮੰਨਦੀ ਉਹ ਜੋਤ ਹੈ ਹੈ ਚੰਦਰਮੇ ਜਿੰਨੀ ਲੋਕਾਂ ਦੀ ਮਨ ਦੇ ਲੈਵਲ ਤੇ ਜੋਤ ਪ੍ਰਗਟ ਮਨਵਤਾਂ ਦਾ ਗਿਆਨ ਚੱਲਦਾ ਤੇਨਾ ਲੋਕਾਂ ਦੀ ਹਰ ਵਕਤ ਇਹ ਤਾਂ ਹਰ ਵਕਤ ਚੱਲਦਾ ਮਨ ਮਨ ਦਾ ਗਿਆਨ ਆਦਮੀ ਦਾ ਗਿਆਨ ਹੈ ਮਾਇਆ ਦੀ ਖੋਜ ਕਰ ਸਕਦਾ ਮਾਇਆ ਦੀ ਖੋਜ ਕਰਨ ਵਿੱਚ ਸਬਰਤ ਹੈ ਆਤਮ ਚਿੰਤਨ ਚਿੰਤਨ ਵਿੱਚ ਸਮਰਥਣੀ ਤੇ ਉਹਦੀ ਮਦਦ ਬਿਨਾਂ ਨੀ ਹੋ ਸਕਦਾ ਕਿਉਂਥੇ ਲੋਕ ਦੀ ਮਦਦ ਠੀਕ ਹੈ ਜੀ ਕਰ ਕਰ ਵੇਖਿਆ ਸੋਈ ਸੰਸਾਰ ਦਾ ਚੰਦਰ ਮਿਲ ਜਨ ਕੋਈ ਭਗਤ ਪ੍ਰਗਟ ਕਰ ਦਿੰਦਾ ਬਸ ਕਿਸੇ ਦੇ ਥਰੂ ਬੰਦੇ ਦੇ ਥਰੂ ਪ੍ਰਗਟ ਕਰਦਾ ਗਿਆਨ ਪਰ ਭਲਾਇਆ ਬੋਲਦਾ ਬੰਦਾ ਆਪ ਨਹੀਂ ਬੋਲਦਾ ਗੁਰ ਤੇ ਦੀਸੇ ਸੋਤੀ ਮਨ ਮੁਖ ਭੂਲੇ ਆਵੇ ਜਾਹ ਗੁਰ ਤੇ ਦੀਸ ਸੋਤੇ ਸੀ ਮੈਂ ਕਿਹਾਂ ਤੋਂ ਪਤਾ ਲੱਗਦਾ ਸਮਝ ਆਉਂਦੀ ਐ ਜੇ ਜਦ ਗਿਆਨ ਆਤਮ ਗਿਆਨ ਅੰਦਰ ਹੈ ਉਹ ਜਿਹਨੂੰ ਤੂੰ ਬਾਹਰ ਟੋਲਦਾ ਤੇਰੇ ਅੰਦਰ ਹੈ ਇਹ ਤਾਂ ਗੁਰ ਤੋਂ ਗੁਰ ਗਿਆਨ ਪਦਾਰਥ ਤੋਂ ਹੀ ਪਤਾ ਲੱਗਦਾ ਇਹ ਤਾਂ ਕੋਈ ਸਤਗੁਰੂ ਦੱਸਦਾ ਆ ਗੁਰਬਾਣੀ ਦਾ ਦੀ ਗੁਰਬਾਣੀ ਦਾ ਗਿਆਨ ਦੱਸਦਾ ਉਹ ਜਰ ਹੁੰਦਾ ਦਿੱਸਾ ਜਿ세 ਹੀ ਇਹ ਤਾਂ ਸਮਝ ਆਉਂਦੀ ਹੈ ਮਨਮੁਖ ਭੂਲਾ ਆ ਜਾ ਹੋਇਆ ਹੋਇਆ ਉਹਨਾਂ ਚ ਜਿ ਨੂੰ ਇਹ ਪੇਧ ਨਹੀਂ ਪਤਾ ਲੱਗਦਾ ਨੂੰ ਇਹ ਪਤਾ ਲੱਗਦਾ ਭਲੇਖੇ ਚ ਰਹਿੰਦੇ ਨੇ ਉਹ ਮਨਮੁਖ ਉਬਾਰ ਅਵਤਾਰ ਬਣਾ ਕੇ ਬੈਠੇ ਨੇ ਜਿਹੜਾ ਕੋਈ ਦੱਸ ਕੇ ਜਾਂਦਾ ਭਗਤ ਉਹ ਉਹ ਦੀ ਪੂਜਾ ਕਰਨ ਲੱਗ ਜਾਂਦੇ ਨੇ ਉਹ ਜੋ ਗੱਲ ਦੱਸੀ ਉਹ ਛੱਡ ਦਿੰਦੇ ਨੇ ਉਹਦੀ ਉਹ ਪੂਜਾ ਕਰਨ ਲੱਗ ਜਾਂਦੇ ਨੇ ਉਹਦੇ ਜੀਵਨ ਨੂੰ ਪੜਨ ਲੱਗ ਜਾਂਦੇ ਨੇ ਉਹਦਾ ਆ ਜੇ ਉਹਨੇ ਕੀਤਾ ਉਹ ਕਰਨ ਲੱਗੇ ਬਸ ਕਰੀ ਦੀ ਉਹਦੀ ਗੱਲ ਤਾਂ ਵੈਸੇ ਸੁਣੀ ਦੀ ਨੀ ਜੀ ਪੂਜਾ ਹੀ ਕਰੀ ਦੀ ਜ਼ਰੂਰ ਗੱਲ ਹੈ ਸੁਣ ਲਈ ਉਹ ਗੱਲ ਪੂਜਾ ਹਟਾਉਂਦਾ ਫਿਰੋ ਹਾਂ ਇਹੀ ਗੱਲ ਰਜਨੀਸ਼ ਨੇ ਵੀ ਆਪਣੇ ਲੈਕਚਰਾਂ 'ਚ ਕਹੀ ਹੈ ਵੀ ਜੀ ਅਸੀਂ ਬੜੇ ਚਲਾਕ ਜੋ ਸਾਨੂੰ ਕੇ ਸੀ ਉਹ ਤਾਂ ਅਸੀਂ ਕਰਨ ਤੋਂ ਹਟ ਗਏ ਉਹਦੀ ਪੂਜਾ ਕਰਨ ਲੱਗ ਗਏ ਉਹਦੀ ਗੱਲ ਨੀ ਸੁਣੀ ਅਸੀਂ ਜੋ ਸੁਣੀਆ ਜਾਂ ਉਹਦੀ ਪੂਜਾ ਕਰ ਲਈਆ ਕਰਨਾ ਮਤਲਬ ਇਹ ਆ ਵੀ ਨਰਾਜ ਨਾ ਹੋਵੇ ਵਾ ਠੀਕ ਪੌੜੀ ਸਮਾਪਤੀ ਹੈ ਜੀ ਹਾਂ ਆ ਹੈ ਜੀ 20ਵੀਂ ਘਰ ਦਰ ਥਾਪ ਫਿਰ ਥਾਨ ਸੁਹਾਵੇ ਆਪ ਪਛਾਣੈ ਜਾਂ ਸਤਿਗੁਰ ਪਾਵੈ ਕਰਦਰ ਥਾਪ ਜੇ ਆਪਣੇ ਘਰ ਦਰ ਨੂੰ ਲੱਭ ਲਵੇ ਉੱਥੇ ਟਿਕ ਜਵੇ ਨਾ ਇਹ ਥਾਪਿਆ ਜਾਵੇ ਹਾਂਜੀ ਫਿਰ ਥਾਨ ਸੁਹਾਵੇ ਉਹ ਥਿਰਥਾਨ ਉਹ ਥਾਨ ਫਿਰ ਹੈ ਆਕਾਸ਼ ਫਿਰ ਹੈ ਉਹਦੇ ਵਿੱਚ ਸੋਹਣਾ ਲੱਗਦਾ ਹੈ ਆਪਣੇ ਮੂੜ ਨਾਲ ਜੁੜਿਆ ਹੋਇਆ ਸੋਹਣਾ ਲੱਗਦਾ ਹੈ ਉੱਥੇ ਸੌਂਦਾ ਸੋਪਦਾ ਪਹਿਲਾਂ ਘਰ ਲੱਭੇ ਫਿਰ ਦਰ ਲੱਭੇ ਫਿਰ ਉੱਥੇ ਟਿਕੇ ਫਿਰ ਫਿਰ ਥਾਨ ਹੈ ਉੱਤੇ ਹੀ ਹੋਉਂਦਾ ਹੈ ਤੇ ਅਗ ਨਹੀਂ ਤਾਂ ਇਹ ਕੁੱਤੇ ਘਰ ਘਰ ਆਪ ਪਛਾਣੇ ਫਿਰ ਆਪ ਪਛਾਣਦਾ ਆਪਣੇ ਆਪ ਨੂੰ ਪਛਾਣਦਾ ਹੈ ਸਰੀਰ ਤੋਂ ਇਲਾਵਾ ਮੈਂ ਆਤਮਾ ਦੇ ਲੈਵਲ ਤੇ ਜੋਤ ਦੇ ਲੈਵਲ ਤੇ ਜੋ ਹੈ ਕਿ ਆਪਣੇ ਆਪ ਨੂੰ ਪਛਾਣਦਾ ਹੈ ਚਾਹ ਸਤਗੁਰ ਦਾ ਗਿਆਨ ਪਾ ਲੈ ਜਾਂ ਕੋਈ ਸਤਗੁਰ ਮਿਲ ਜਾਂਦਾ ਹੈ ਸੱਚ ਦੇ ਗਿਆਨ ਤੋਂ ਬਾਅਦ ਆਪਣੇ ਆਪ ਨੂੰ ਪਛਾਣਦਾ ਪਾਵ ਪ੍ਰਾਪਤੀ ਕਰਦਾ ਸਤਗੁਰ ਜੀ ਹੁਣ ਆਪ ਜੇ ਉਹ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਫੇਮੁਕ ਵੀ ਜਿੱਤੇ ਸਬਦਲ ਕਰੇ ਵਿਚਾਰ ਉਹਨੇ ਜੇ ਰੋ ਕਹਿਆ ਉਹਦੀ ਗੱਲ ਦੀ ਵਿਚਾਰ ਕਰੇ ਉਹੀ ਉਹ ਜੋ ਪ੍ਰਾਪਤੀ ਹੈ ਉਹੀ ਸਤਗੁਰ ਦੀ ਪ੍ਰਾਪਤੀ ਹੈ ਜੇ ਆਸਾ ਤੇ ਬਿੰਦ ਬਿਨਾਸਾ ਫੁੱਟੇ ਖੱਪਰ ਦੁਬਿਧਾ ਮਨਸਾ ਜਿੱਤੇ ਕਹਿੰਦੇ ਆਸਾ ਹੈ ਅਬਾਰ ਮਾਇਆ ਦੀ ਕੋਈ ਉੱਥੇ ਤਾਂ ਬਿੰਦ ਜੋ ਦੀ ਸੇ ਉਹ ਦੁਨੀਆਂ ਦੀ ਲੋਤਾ ਵਾਲੀ ਹੈ ਦੀ ਆਸਾ ਉਹ ਤਾਂ ਬਿੰਦ ਬਿਨਾਸਾ ਉੱਥੇ ਤਾਂ ਮਲਣਾ ਜਮਣਾ ਰਹੂਗਾ ਕੁਝ ਖੱਪਰ ਦੁਬਿਧਾ ਮਨਸਾ ਦੁਬਦਾਰ ਮਨਸਾ ਵਾਲੇ ਜਿਹੜੇ ਖੱਪਰ ਨੇ ਮੰਨਦੇ ਨਾ ਇਹ ਹਮੇਸ਼ਾ ਫੁੱਟਦੇ ਰਹੇ ਨੇ ਫੁੱਟ ਕੇ ਮਰਦੇ ਰਹੇ ਨੇ ਹੁਣ ਮਰਦੇ ਰਹਿਣਗੇ ਖੱਪਰ ਹੈ ਜੋਗੀ ਨਾ ਥੋੜਾ ਖੱਪਰ ਵਾਸਤੇ ਇਹ ਕਹਿੰਦਾ ਫੁੱਟੂ ਕੋਈ ਖੱਪਰ ਇਹ ਛੱਟਾਂ ਜੋਗੀਆਂ ਦੀ ਰਹਿੰਦੇ ਆ ਸਰਚ ਫਿੱਟਵਾਲ ਨੇ ਜੋਗੀ ਜਾਣ ਤਾਂ ਕਿ ਜੋਗੀ ਨੂੰ ਇਹ ਗੱਲ ਕਹੀ ਹੋਈ ਆ ਸਪੋਜ਼ਰ ਕੀਤਾ ਇਹਨਾਂ ਦੇ ਵਿੱਚ ਪੰਡਤ ਨੂੰ ਨਹੀਂ ਕੀਤਾ ਹੋਇਆ ਸਰ ਜੋਗ ਜੋਗ ਚੱਲਦੀ ਹਾਂ ਪੰਦਤ ਜੀ ਨਾਲ ਗੱਲ ਹੈਗੀ ਇਹ ਦੇ ਵਿੱਚ ਫਿਰ ਜਪਜੀ ਸਾਹਿਬ ਜੋ ਲਿਖਿਆ ਸੀਗਾ ਥਿਤਵਨ ਜੋਗੀ ਜਾਣੇ ਉਹ ਗੱਲ ਇੱਥੇ ਆ ਕੇ ਖੁੱਲਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਵਤ ਨਾਨਕ ਹਮ ਤਾਂ ਕੇ ਦੱਸਤਾ ਮਮਤਾ ਜਾਲ ਮਮਤਾ ਨੂੰ ਜਾਲ ਲਵੇ ਤੇ ਰਹੇ ਜਿਹੜੀ ਮੈਂ ਹੈ ਨਾ ਮੈਂ ਸਰੀਰ ਕਰਕੇ ਹੈ ਇਹਨੂੰ ਜਾਲ ਸਰੀਰ ਮੈਂ ਮੈਂ ਨਹੀਂ ਕੁਝ ਆ ਨਹੀਂ ਜਾਲ ਇਹ ਤੇ ਜਾਲ ਕੀ ਬੰਦ ਹੈ ਹੈ ਹੀ ਨਹੀਂ ਕੁਝ ਐਸੇ ਮੇਰਾ ਕੋਸ਼ ਹੈ ਸੰਸਾਰ ਦੀ ਮਮਤਾ ਜਾਲ ਤੇ ਰਹੇ ਉਦਾਸਾ ਉਦਾਸੀ ਕੀ ਹੁੰਦਾ ਹੈ ਕਹੀ ਜਾਂਦੇ ਨੇ ਉਦਾਸੀ ਉਹਨਾਂ ਨੂੰ ਕੀ ਪਤਾ ਉੱਤ ਜਮਾ ਅਸਤ ਪਹਿਲਾਂ ਉਚਾ ਆਸਾਦੀ ਉਚਾ ਆਸਾ ਤੋਂ ਉਤਾਸਾ ਬਣਿਆ ਉਤਾਸਾ ਤੋਂ ਉਦਾਸਾ ਬਣਿਆ ਉੱਚੀ ਆਸ ਉੱਚੀ ਤੋਂ ਉੱਚੀ ਆਸ ਹੈ ਜਿਹੜੀ ਉੱਚਤਮ ਆਸ ਉੱਚਤਮ ਆਸ ਤਾਂ ਇਹ ਨਾਮ ਦੀ ਹੋਈ ਹੈ ਅੱਛਾ ਪਰ ਇਹਦਾ ਇੱਕ ਇਹਨੇ ਮਮਤਾ ਜਾਲ ਤੇ ਰਹੇ ਕੇ ਆਸ ਮਾਇਆ ਤੋਂ ਉੱਪਰ ਕਰ ਲਵੇ ਅੱਛਾ ਜੀ ਜਿਹੜਾ ਮਾਇਆ ਪਤੀ ਹੈ ਉਹਦੀ ਆਸ ਕਰੇ ਮੈਨੂੰ ਕਹਿੰਦਾ ਨੇ ਜਿਸਕੇ ਹਿਰਦੇ ਧਨ ਬਸ ਹੈ ਜਿਹਦੇ ਹਿਰਦੇ ਚ ਗਿਆਨ ਬਸ ਜਾਂਦਾ ਨਾ ਗਿਆਨ ਮੁਰਬਾਨੀ ਦਾ ਤਿੰਨ ਲੋਕ ਦਾ ਇਸ ਕਾ ਨੌ ਫਕੀਰ ਮੁਸਲਮਾਨ ਫਕੀਰ ਕਹਿੰਦੇ ਨੇ ਨਾ ਉਹ ਕਹਿੰਦੇ ਫਕੀਰ ਕਹਿ ਸਕਦੇ ਆ ਉਹਨੂੰ ਅਸੀਂ ਫਕੀਰ ਸੰਤ ਨਹੀਂ ਕਿਹਾ ਉਹਨੂੰ ਫਕੀਰ ਕਿਹਾ ਜਿਸਕੇ ਹਿਰਦੇ ਧਨ ਵਸੇ ਤਿਸ ਕਾ ਫਕੀਰ ਪਰ ਜਿਸਕੇ ਹਿਰਦੇ ਤੂੰ ਵਸੇ ਇੱਕ ਦੇ ਹਿਰਦੇ ਤਾਂ ਤੇਰਾ ਗਿਆਨ ਆ ਇੱਕ ਦੇ ਹਿਰਦੇ ਤੂੰ ਆ ਪਈਂ ਜਿਹਦੇ ਅੰਦਰ ਤੇਰੀ ਭੁਖ ਹੋਵੇ ਤੇਨਰ ਗੁੜੀ ਕੀ ਉਹ ਗੁੜੀ ਕੀ ਨੇ ਫਿਰ ਉਹ ਫਕੀਰ ਤਾਂ ਉੱਪਰ ਦਾ ਗੁਲੀ ਗੀਰਦੀ ਪਦਵੀ ਫਕੀਰ ਤੋਂ ਉੱਪਰ ਹੈ ਫਕੀਰ ਕੋ ਦੋ ਪਦਾਰਥ ਨੇ ਚਾਲਦੀ ਹੈ ਤੇ ਮਮਤਾ ਜਾਲ ਦੋ ਪਦਾਰਥ ਹੈ ਤੇ ਉਦਾਸਤਾ ਚਾਰ ਪਦਾਰਥ ਹੋ ਗਏ ਆਂ ਉਦਾਸਤਾ ਦੀ ਆਸ ਰੱਖੇ ਬੇਨਤੀ ਹੈ ਫਿਰ ਮੈਂ ਉਸ ਬੰਦੇ ਦਾ ਮੈਂ ਵੀ ਦਾਸ ਆਈ ਭਾਈ ਜੇ ਐਸਾ ਬਸਤਾਜ ਕੋਈ ਚਲਾ ਜਾਵੇ ਕੋਈ ਟਾਰਗੇਟ ਆਪਣਾ ਬਣਾ ਲਵੇ ਉੱਪਰ ਮਾਇਆ ਤੋਂ ਜਿਹਦਾ ਟਾਰਗੇਟ ਹੈ ਹਾਲਾਂਕਿ ਆਪ ਪਰ ایسے ਦੇ ਜਿਹਦੇ ਅੰਦਰੇ ਭਾਵਨਾ ਵੀ ਪੈਦਾ ਹੋਵੇ ਗੁਰਬਾਣੀ ਹੁਣ ਕੇ ਬੰਕੇ ਉਹਦਾ ਦਾਸ ਬੰਦਾ ਸਿੱਖ ਨੂੰ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਚੰਗੀ ਲੱਗੀ ਹਾਂ ਇਹ ਕਹਿੰਦਾ ਨਾ ਹੀ ਮਾਇਆ ਹੀ ਠੀਕ ਹੈ ਅਜੀ ਗੁਰਨਾਨ ਦੇ ਗੁਰੂ ਹੈ ਠੀਕ ਹੈ ਸਾਨੂੰ ਆਪ ਨਹੀਂ ਤੇ ਬੰਦ ਤੇ ਜਿਹੜੇ ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ ਨਾਲੇ ਬਿਲਾਵਲ ਮਹੱਲਾ ਪਹਿਲਾ ਖਿੱਤੀ ਦਾ 10ਵਾਂ ਜੱਟ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਹਾਂ ਜੀ